ਸ਼ਲੋਕ ਮਹਲਾ ਤੀਜਾ ਸਤਗੁਰ ਸਿਓ ਚਿਤਨਾ ਲਾਇਓ ਨਾਮ ਨ ਵਸਿਓ ਮਨ ਆਏ ਪ੍ਰਿਗਿ 에ਵੇ ਹ ਜੀਵਿਆ ਕਿਆ ਯੁਗ ਮੈਂ ਪਾਇਆ ਆਏ ਕੋਈ ਨਹੀਂ ਸਤਗੁਰ ਦੀ ਗੱਲ ਸਤਗੁਰ ਦਾ ਪਿੱਛਾ ਦੇਖ ਲਿਆ ਕੀ ਕਰਦਾ ਹਾਂਜੀ ਸਤਗੁਰ ਮਾਇਨਾਂ ਚਿਤ ਨਹੀਂ ਨ ਲਾਇਆ ਤੂੰ ਦਾ ਹੀ ਹੋਇਆ ਫਿਰ ਗੱਲ ਉੱਥੇ ਆ ਗਈ ਨਾ ਇਹਦੀ ਆਪਣੀ ਮਰਜ਼ੀ ਦੀ ਗੱਲ ਆ ਗਈ ਪਰਮੇਸ਼ਰ ਦੀ ਕੋਈ ਮਰਜ਼ੀ ਇਹ ਤਰਬੋਲ ਨਾਲ ਜਿੱਤੇ ਦੀ ਨਾਮ ਦੀ ਬਾਤ ਆ ਸਕਦਾ ਬੰਦਾ ਆ ਕੇ ਦਾ ਕੀ ਭਾਵ ਹੈ ਜੀ ਧਿਆਨ ਲਾਉਣਾ ਧਿਆਨ ਵੀ ਚਿੱਤ ਹੈ ਅੱਛਾ ਜੀ ਜੇ ਧਿਆਨ ਅੱਛਾ ਦੋ ਗੱਲਾਂ ਆ ਇੱਥੇ ਮਨ ਵੀ ਆ ਤੇ ਚਿੱਤ ਵੀ ਆ ਗਿਆ ਇਸੇ ਪੰਕਤੀ 'ਚ ਸਤਿਗੁਰੂ ਸਿਓ ਨਾਲ ਧਿਆਨ ਚਿੱਤ ਅੱਛਾ ਮਨ ਕੀ ਹੈ ਨਾਮ ਨਾਲ ਵਸਿਓ ਮਨ ਡੋਲਦਾ ਨਾ ਮਨ ਡੋਲਦਾ ਜਿੱਤਨੇ ਫੈਸਲਾ ਕਰਨ ਨੂੰ ਨਾ ਬੰਨ ਨੂੰ ਨਹੀਂ ਸੁਣ ਲੈਂਦਾ ਅੱਛਾ ਜੀ ਫਰਜ਼ਾ ਫਿਰ ਬੁੱਧੀ ਚੇਤਨ ਲਈ ਕੰਮ ਨਾ ਆ ਗਏ ਨੇ ਚਿੱਤ ਕਾ ਲੋ ਚਲੂ ਮੋਕ ਕਾ ਲੋ ਅੱਛਾ ਕਦੇ ਸਿੱਧੋ ਜਵਾਬ ਦੇ ਦਿੰਦਾ ਕਦੇ ਪਾਰੋ ਜਵਾਬ ਦੇ ਦਿੰਦਾ ਹਾਂ ਪਾਰੋਂ ਦਾ ਵਾਂ ਗੱਲਾਂ ਤੋਂ ਜਵਾਬ ਦਿੰਦਾ ਜਿਹੜੇ ਤੇ ਓਗੜ ਤੇ ਓਗਣ ਨੇ ਬਾਹਲੇ ਨੂੰ ਨੇ ਉਹਨਾਂ ਤੋਂ ਜਰਾਬ ਛੱਗਾ ਨਾਲ ਜਦਾਂ ਉਹ ਤਾਂ ਉਹ ਜਵਾਬ ਦੇਂਦੇ ਕੇਸ ਰੱਖਾਂ ਨਾਲ ਰੱਖਾਂ ਦਾੜੀ ਰੱਖਾਂ ਦੇ ਨਾਲ ਰੱਖਾਂ ਉਹ ਬੁਰਾ ਜਿਹਾ ਲੱਗੂ ਪਰ ਜੁੱਬਲਵਾਰੀਆਂ ਅੱਜਲੇ ਦੀਆਂ ਨੇ ਤੇ ਆ ਕੇ ਉਹ ਪੈਰ ਖਿੱਚ ਲੰਨੇ ਬਿਜੇ ਨੂੰ ਆ ਦੋ ਨੇ ਠੀਕ ਹੈ ਜੀ ਇਵੇਂ ਜੀਵਿਆ ਕਿਆ ਯੁਗਮਹਿ ਪਾਇਆ ਆਏ ਇਹੋ ਜੀਵਨ ਜੀ ਕੇ ਕੀਬਲਾ ਪ੍ਰਾਪਤੀ ਕਰ ਲਈਏ ਜੁਗ ਦੇ ਵਿੱਚ ਇਸ ਸਮੇਂ ਚ ਇਹ ਜੀਵਨ ਜੇ ਸਮੇਂ ਰਹਿ ਜਾਣੀ ਆ ਨਾਲ ਕੀ ਜਾਣੀ ਆ ਨਾਲ ਨਹੀਂ ਆਣੀ ਉਹਦੀ ਰਹਿਣੀ ਕੀ ਆ ਜਿੱਤਾ ਖੜਕਾ ਵੀ ਹੁੰਦਾ ਜਦ ਜਾ ਖੁੱਲ ਜਾਣੀ ਆ ਉਹਦੀ ਚਿੰਤਾ ਹੀ ਜਿੱਤਾ ਬੜੇ ਬੜੇ ਜੇ ਵੀ ਸੇ ਲੋਕ ਤੱਕੋ ਵਿਆਪੇ ਚਿੰਤਾ ਰੋਗੋ ਕੁਝ ਬੀੜਾਂ ਚ ਕਹਿੰਦੇ ਆ ਉਹ ਕਿ ਯੁੱਗ ਦੀ ਜਗ੍ਹਾ ਜਗ ਹੋਣਾ ਚਾਹੀਦਾ ਕੀ ਯੁੱਗ ਹੋਣਾ ਚਾਹੀਦਾ ਕਿ ਜਗ ਹੋਣਾ ਚਾਹੀਦਾ ਅਖਰ ਯੁੱਗ ਅੱਛਾ ਜੀ ਸਮ ਜਗ ਜਿਹੜਾ ਹੁੰਦਾ ਹੈ ਨਾ ਜੰਗਲ ਸਰੀਰ ਨੂੰ ਕਹਿੰਦੇ ਨੇ ਅੱਛਾ ਜੀ ਇਹ ਸਮਾਂ ਜਿਹੜੇ ਸਮੇਂ ਜਗ ਜਬਦਲੇ ਜਗ ਹੋਈ ਹੈ ਜੁਗ ਦੀ ਉਹ ਜੁਗ ਬਦਲੇਆ ਜਗ ਦੀ ਬਦਲੇਆ ਗੁਰੂ ਆਗਦਾ ਜੁਗ ਬਦਲ ਗਿਆ ਜਗ ਦੀ ਬਦਲੇਆ ਜਗ ਸ੍ਰੀ ਰੋਈ ਹੈ ਇਹ ਜਗ ਸੱਚੇ ਕੀ ਆ ਕੋਸੜੀ ਸੱਚੇ ਕਾ ਵਿੱਚ ਬਾਤ ਜਿਉਂ ਨਾਲੇ ਖਾਨੇ ਗੱਲ ਬਹਿਜ ਹੈ ਬਨ ਲੈਣ ਵੀ ਹਾਂ ਇਹ ਤਾਂ ਗੱਲ ਬਿਲਕੁਲ ਠੀਕ ਹੈ ਉਹ ਗੁਰੂ ਵਾਲੇ ਬਣ ਜਾਣ ਹੋਰ ਆਪਨ ਹੋਰ ਕੀ ਚਾਹੀਦਾ ਠੀਕ ਹੈ ਜੀ ਹਾਂਜੀ ਮਾਇਆ ਖੋਟੀ ਰਾਸ ਹੈ ਏਕ ਚਸੇ ਮੈਂ ਲਹਿ ਜਾਏ ਇਹ ਮਾਇਆ ਬਾਹਰ ਦੀ ਇੱਕ ਹੋਟੀ ਰਾਸ ਹੈ ਚਾਹੇ ਸ਼ਰੀਰ ਵੀ ਹੈ ਸ਼ਰੀਰ ਵੀ ਹੋਟੀ ਰਾਸ ਹੈ ਕਵਲਕਾਦੋ ਖੋਟ ਪੈਦਾ ਹੋ ਆ ਗਿਆ ਜਦੋਂ ਗਿਆ ਕੰਮ ਤੇ ਖੋਟੀ ਰਾਸ ਹੱਥੋਂ ਛੁਟਕੀ ਤਨ ਸਿਆਹ ਹੋਏ ਬਦਨ ਜਾਏ ਕੁਮਲਾਈ ਹੱਥੋਂ ਛੁਟ ਗਈ ਮਨ ਹੱਥਾ ਹੱਥਾਂ ਜੁੜ ਗਈ ਹੁਣਾਂ ਦਾ ਹੱਥ ਗਰਦਨ ਨੂੰ ਪਾਇਆ ਹੋਇਆ ਦਾ ਹੱਥੋਂ ਜੁੜ ਗਈ ਤਾਂ ਛੁੱਟ ਗਈ ਮਟਕੀ ਸੀ ਹੱਥੋਂ ਛੁੱਟ ਗਈ ਕੀ ਜੁੜ ਖੱਬਾ ਬੁੱਧੀ ਰੂਪੀ ਹੱਥ ਤੇਰੀ ਨੂੰ ਪਾਇਆ ਹੋਇਆ ਜਾਂ ਛੁੱਟ ਜਦੋਂ ਕੰਮ ਆ ਜਾਣੀਆਂ ਸਾਬ ਹੋ ਜਾਣਾ ਰੱਖ ਚਾਹੋ ਸੇਤ ਜੇ ਥੱਲੇ ਵਾਲੇ ਨੇ ਸਾਹ ਲੈਣਾ ਚੜ੍ਹ ਜਾਣਾ ਇਹ ਪੇਸਿਆਂ ਸੇਤ ਰੰਗ ਦਾ ਹੋ ਜਾਣਾ ਕੀ ਜੇ ਜੀ ਹੱਥੋਂ ਛੁਟ ਗਈ ਤਨ ਸਿਆਹ ਹੋਏ ਬਦਨ ਜਾਏ ਕੁਮਲਾਈ ਬਦਨ ਜਾਏ ਤਮੜਾਏ ਕਮੜਾ ਜਾਂਦੇ ਬਦਨ ਜਿਨ ਸਤਗੁਰ ਸਿਓ ਚਿਤ ਲਾਇਆ ਤਿੰਨ ਸੁਖ ਵਸਿਆ ਮਨ ਆਈ ਹੋ ਗਏ ਪਹਿਲਾ ਜੀ ਨਾਲ ਬਧੀਦੀ ਉਹਨੇ ਚਿਤ ਲਾਇਆ ਇਹਨਾਂ ਨੇ ਚਿਤ ਸਤਗੁਰ ਨਾਲ ਲਾਤਾ ਅਸਲ ਚ ਚਿਤ ਨਹੀਂ ਫੈਸਲਾ ਕਰਨਾ ਆਖਰੀ ਵੱਜਣਾ ਨਾ ਵੱਜਣਾ ਬੰਦੇ ਵਸਦੀ ਗਾਂਦੀ ਜੇ ਚਿੱਤ ਉਸ ਟੈਂਡ ਲਾ ਜਾਏ ਮਨ ਉਹ ਕੁਛ ਨਹੀਂ ਕਰ ਕੀ ਕਰੂਗਾ ਨਿਕਲ ਜਾ ਮੇਰੀ ਬੰਦਾ ਸਹੀ ਗੱਲ ਕੋਈ ਜੇ ਲੱਗ ਜਾਂਦਾ ਨਾ ਜਮੀਨ ਚੀ ਲੱਗ ਜਾਂਦਾ ਸਿਕਲ ਵੀ ਫੜਾ ਲੈਣ ਦੇ ਤੇ ਸਕੂਟਰ ਵੀ ਫੜਾ ਲੈਣ ਦੇ ਪਾਜਾ ਬੂੜਵਾ ਨਾ ਬਾਹਰ ਕੱਪੜੇ ਵੀ ਦੇ ਜਦ ਨਸ਼ਾ ਜਾਇਆ ਉਤਰ ਜਾਂਦਾ ਉਹ ਤਾਂ ਉਹ ਨਾ ਇਹ ਰਹਿ ਜਾਂਦਾ ਜਦ ਸੱਜਣਾ ਹੀ ਆ ਜਿੱਤ ਕੱਖੇ ਹੋ ਗਏ ਮੁਰ ਕੁਛ ਦੀ ਹੈ ਪਰ ਬੁੱਧੀ ਖਰਾਬ ਕਰਦੀ ਹੈ ਬੰਦ ਖਰਾਬ ਕਰਦੀ ਹੈ ਪੁੱਤ ਨੂੰ ਜਿੰਨਾ ਜਦ ਉਧਰ ਹੁੰਦੀ ਹੈ ਜਦ ਵਿਚਾਰਾ ਕੱਲਾ ਰਹਿ ਜਾਂਦਾ ਉਹਦਾਂ ਜਦ ਜੋ ਕੋ ਟੋਹ ਜਾਂਦੀ ਉਹ ਤਾਂ ਦੀ ਹੈ ਚਿਤ ਲਾਇਆ ਤਿੰਨ ਸੁਖ ਵਸਿਆ ਮਨ ਆਏ ਇਹਨਾਂ ਸੋਖ ਤੇ ਸੋਖ ਵਸ ਗਿਆ ਠੀਕ ਹੈ ਉਹਨਾਂ ਦੇ ਫਿਰ ਮੁਖ ਉਜਲੇ ਹੋਣਗੇ ਹਾਂ ਜੀ ਪਿਛਲੇ ਵਾਲਿਆਂ ਦੇ ਕਾਲੇ ਹੋਗੇ ਸੀ ਜਿਵੇਂ ਬੜੇ ਹਨੇਰਾ ਜਾਏ ਆਦਮੀ ਦੇ ਅੰਦਰ ਖੁਸ਼ੀ ਹੋਈ ਖੇੜਾ ਤਾਂ ਜਦੇ ਹੋ ਗਿਆ ਨਾਲ ਹਾਂਜੀ ਜਿਹੜਾ ਤਾਂ ਜਦੇ ਘੜ ਗਿਆ ਹਰ ਨਾਮ ਧਿਆਵੇਂ ਰੰਗ ਸਿਉ ਹਰ ਨਾਮ ਰਹੇ ਲਿਬਲਾਈ ਹਰ ਨਾਮ ਧਿਆਵੇਂ ਸਾਰੇ ਆ ਨਾਮ ਜੁੱਤੇ ਆਨ ਲੱਗਦੇ ਨੇ ਰੰਗ ਨਾਲ ਦੀ ਨਾਲ ਛਿੜੀ ਜਾਂਦੇ ਜੇ ਰੰਗ ਵੀ ਨਾ ਚੜਦਾ ਉਹ ਧਿਆਨ ਦੀ ਨ ਜਾਪਾ ਚਾਹੀਦਾ ਰੰਗ ਚੜ੍ਹਨ ਦਾ ਮਤਲਬ ਕੀ ਹੈ ਰੰਗ ਦਾ ਮਤਲਬ ਇਹ ਨਹੀਂ ਕਿ ਲਾਲ ਹੋ ਜਾਣਾ ਚਾਹੀਦਾ ਉਹਦਾ ਸੁਭਾਅ ਨੂੰ ਰੰਗ ਚੜਦਾ ਸੁਭਾਅ ਬਦਲਦਾ ਸੁਭਾਅ ਬਦਲ ਨਾ ਜਾਂਦਾ ਉਹ ਹੋ ਮੇ ਕਹਾਂ ਲੱਗ ਜਾਂਦੀ ਹੈ ਲੋਭ ਘਟਾਣਾ ਵੀ ਚੜਦਾ ਹੈ ਸਭਨਾ ਪ੍ਰੇਮ ਵਧਾਣਾ ਚੜਦਾ ਹੈ ਤਬ ਨੂੰ ਮੁਆਫ ਕਰਨਾ ਕਿ ਆ ਉਹ ਇਹ ਛੱਡੋ ਇਹਨੇ ਤਾਂ ਆਪਣੇ ਨਾਲ ਨੁਕਸਾਨ ਕੀਤਾ ਦਾ ਚੱਕੀਤਾ ਆਪਣਾ ਕਿਹੜਾ ਹੋ ਗਿਆ ਚੋਪਰ ਦੀ ਗੱਲ ਦੁੱਤਾ ਲੱਗ ਜਾਂਦਾ ਦੁਸ਼ਮਣੀ ਉਹ ਲੱਗ ਜਾਂਦਾ ਜਿਹਨੇ ਕੀਤੀ ਉਹ ਨੂੰ ਆਪਣੇ ਵੱਲੋਂ ਸਾਗਾ ਫਿਰਦਾ ਇਹ ਕਰੂਗਾ ਆਪੇ ਪਰੂਗਾ ਆਪਣਾ ਦੀ ਕੁਝ ਫਿਕਰਦਾ ਇਹਦੇ ਕਰੇ ਤੇ ਤੁਸੀਂ ਜਿੰਤਾਣਾ ਕਰੋ ਕਰਦੇ ਆ ਸਮਝਾਉਂਦਾ ਜਾਂ ਹੋਣਾ ਹੀ ਤੁਹਾਡੇ ਨਾਲ ਆ ਕਦੇ ਤੇ ਹੋਣਾ ਕੀ ਹੈ ਮੂਰਖ ਦੇ ਜੇ ਕਦੇ ਮੂਰਖ ਥੁੰਲਵੇ ਗਲ ਵੀ ਐ ਕਹਦਾ ਉਹ ਆਪੇ ਬਜਾਰਾ ਲੀਵਾ ਹੋ ਜਾਂਦਾ ਹੈ ਜੇ ਮੂਰਖ ਸੁਣ ਲਵੇ ਵੀ ਇਹ ਤਾਂ ਹੈ ਕਹਿੰਦਾ ਉਹ ਆਪੇ ਪੈਰੀ ਪੈ ਜਾਂਦਾ ਆਪੇ ਪੈਰੀ ਬਬੇ ਦਾ ਅੰਦਰੋਂ ਦਾ ਸੋ ਧਨ ਸੌਪਿਆ ਜੇ ਜੀਵੇਂ ਰਹਿਐ ਨਾਨਕ ਕਹਿੰਦਾ ਸਤਗੁਰ ਨੇ ਉਹ ਤੁਹਾਨੂੰ ਦਿੱਤਾ ਹੈ ਜੇ ਜੀਵੇਂ ਰਹੇ ਜਿਹੜਾ ਜੀ ਦੇ ਵਿੱਚ ਐ ਸਮਾ ਗਿਆ ਜਿਵੇਂ ਦੁੱਧ ਦੇ ਵਿੱਚ ਕਿਉਂ ਸਮਾ ਜਾਂਦਾ ਪਰ ਪਹਿਤਮਾ ਮੱਖਣ ਪਾਛੇ ਦੁੱਧ ਜੇ ਮੱਖਣ ਹੈਗਾ ਸੀ ਦੁੱਧ ਬਣੀ ਹੀ ਤਾਂ ਉਹਨੇ ਲੱਭਦਾ ਜਿੱਥੇ ਤਾਂ ਸਾਹਮਣੇ ਸਮਾਉਂਦਾ ਉਥੇ ਤਾਂ ਪਾਣੀ ਸੰਗ ਪਾਣੀ ਜੋਤ ਮਿਲੀ ਪਾਣੀ ਸੰਗ ਪਾਣੀ ਚਾ ਸਮਾਇਆ ਹੈ ਜਾ ਕੇ ਸਮਾਇਆ ਐ ਸਮਾਉਂਦਾ ਦੁੱਧ ਦੇ ਵਿੱਚ ਕਿਉਂ ਸਮਾਇਆ ਲੱਭਦਾ ਹੀ ਨਹੀਂ ਖਾ ਕਹਿਣ ਦਾ ਮਕਸਦ ਇਥੇ ਹੈ ਤਤ ਗਿਆਨ ਤਤ ਗਿਆਨ ਸਤਿਗੁਰੂ ਬਵੇਕ ਹੈ ਬਵੇਕ ਸਮਾ ਗਿਆ ਦੋਹਾਂ ਦੇ ਵਿੱਚ ਦੋਹੇ ਬਵੇਕੀ ਬਣ ਗਏ ਜੋ ਤੋਹੀ ਹੈ ਬਵੇਕੀ ਦੇ ਦੋਹੇ ਬਵੇਕੀ ਦੇ ਸਤਿਗੁਰ ਤੋਂ ਧਨ ਪ੍ਰਾਪਤ ਕਬੀਰ ਮੈਂ ਐਸੋ ਗੁਰ ਪਾਇਓ ਜਾਸਾ ਵੀ ਬਵੇਕੀ ਹੋ ਗਿਆ ਜਬਾਨ ਲੈ ਆ ਠੀਕ ਹੈ ਜੀ ਰੰਗ ਤੇ ਸਹਿ ਕੋ ਅਗਲਾ ਵੰਨੀ ਚੜੇ ਚੜਾਈ ਇਹ ਪਾਣੀ ਨਾਲ ਪਾਣੀ ਦੀ ਅਗਲਾ ਲਾ ਕਿੱਥੇ ਚੜਦਾ ਫਿਰ ਉਹਨੂੰ ਪਾਣੀ ਨੂੰ ਫਿਰ ਕਿਹੜਾ ਰੰਗ ਦਿੰਦੇ ਫਿਰ ਅੰਕ ਪਾਉਣਾ ਪੈਂਦਾ ਰੰਗ ਕਿਸੇ ਕੋ ਅਗਲਾ ਹੁਣ ਅਗਲਾ ਗਿਆਨ ਘੋਰ ਮਿਲਦਾ ਹੈ ਉਹਾਂ ਤੇ ਗਾਂਹਾਂ ਗਾਂਹਾਂ ਗਾਂਹਾਂ ਤੇ ਗਾਂਹਾਂ ਅਗਲਾ ਕਿਉਂ ਮਿਲਦਾ ਪਰਮਾ ਅੰਦ ਦੀ ਜਿਹੜੀ ਸੀਮਾ ਸੀ ਪਾਰ ਕਰ ਗਈ ਪਰਮਾ ਦੀ ਸੀਮਾ ਪਾਰ ਕਰੀ ਕੁਣ ਅੱਗੇ ਕੁਛ ਨਹੀਂ ਆਉਣਾ ਅਗਲਾ ਅਲੱਗ-ਅਲੱਗ ਚੜਦਾ ਹੀ ਰਹਿਣਾ ਚੜਦਾ ਹੀ ਰਹਿਣਾ ਚੜਦਾ ਹੀ ਸੀਮਾ ਆਪਣੇ ਆਪ ਇਹ ਅਲੱਗ-ਅਲੱਗ ਹੋਣਗੇ ਤੁਸੀਂ ਚਾਹੇ ਜੋਰ ਲਾ ਕੇ ਦੇਖ ਲਿਓ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਮੈਂ ਉਹੀ ਅਰਥ ਕਰਾਂ ਕਦੇ ਵੀ ਹੋ ਸਕਦੇ ਤੁਸੀਂ ਅਰਥ ਪਰ ਇਹ ਤਾਂ ਜੇ ਗਿਆਨ ਅੰਦਰੋਂ ਆਵੇ ਜੇ ਰਟਿਆ ਹੋਇਆ ਫਿਰ ਤਾਂ ਉਹੀ ਅਰਥ ਹੋਣਾ ਕੋਈ ਤਾਂ ਪਰਫੂਲ ਠੀਕ ਨਹੀਂ ਤਾਂ ਸਾਬ ਸਾਲ ਦਾ ਰੱਟਾ ਹੈ ਫੇ ਲੱਗਿਆ ਹੈ ਹਾਂਜੀ ਮਹੱਲਾ ਤੀਜਾ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਮਾਇਆ ਹੋਈ 나ਗਣੀ ਇਸ ਦੀ ਸੇਵਾ ਵੱਲ ਵੱਲ ਬਿੰਦੂ ਠੀਕ ਹੈ ਆ ਜਣੀ ਆ ਨਾ ਵਿਕਾਸ ਵਿਕਾਸ ਇਹਦੀ ਸੇਵਾ ਬినాਸ਼ ਦੇ ਵਿੱਚੇ ਆ ਕਰੂ ਜਿਹੜਾ ਵਿਕਾਸ ਕਰੂ ਵਿਕਾਸ ਕਰਨ ਵਾਲਿਆਂ ਦਾ ਬినాਸ਼ ਕਰਦੀ ਹੈ ਜਿੰਨੀਆਂ ਗੱਲਾਂ ਜਿਆਦਾ ਇਸ ਦੇ ਜਿੰਨੀਆਂ ਗੱਡੀਆਂ ਤੇਜ਼ ਰਫ਼ਤਾਰ ਜਿਆਦਾ ਹੁੰਦੇ ਅਲਟਪਲਟ ਜਿਆਦਾ ਹਾਂਜੀ ਫਿਰ ਖਾਏ ਉਹਨੂੰ ਰੋ ਹਾਏ ਦਾ ਮਤਲਬ ਇਹ ਹੈ ਕਿ ਉਹਦਾ ਸਾਰਾ ਜੀਵਨ ਖਾ ਜਾਂਦੀ ਹੈ ਉਹਦੀ ਅਕਲ ਖਾ ਜਾਂਦੀ ਹੈ ਹਾਂਜੀ ਆਪਣਾ ਕੰਮ ਜਿਹੜਾ ਕੰਮ ਆਇਆ ਕਰਦਾ ਸੱਚੀ ਪੁੱਛੀ ਦੀ ਸਰਪਣੀ ਦੀ ਵੀ ਖਾ ਰਹੀ ਬਣਾ ਕੇ ਰੱਖ ਦੇਣੇ ਤੇ ਸਾਰਾ ਜੀਵਨ ਬਰਬਾਦ ਕਰਤਾ ਖਾਜੀ ਵਸੋਤੀ ਹੈ ਅਕਲ ਖਾ ਗਈ ਸਾਡੀ ਅਕਲ ਹੈ ਸਾਡੇ ਕੋਲ بڑے بڑے ਟੈਕਨੀਸ਼ੀਅਨ ਨੇ ਸਾਡੇ ਕੋਲ ਜੇ ਉਹ ਭ੍ਰਮ ਗਿਆ ਵਾਲੇ ਪਾਸੇ ਪੈ ਜਾਂਦੇ ਭਵ ਸੰਗਤ ਕਰ ਜਾਂਦੇ ਐਡੇ ਐਡੇ ਦਿਮਾਗਦਾਰ ਆਦਮੀ पर माया ਦੇ ਗਿਆਨ ਚ ਜੁੜ ਕੇ ਇੱਥੇ ਜੋ ਵੀ ਰਹਿ ਗਏ ਬੁੱਧੀਹੀਣ ਹੋ ਗਏ ਐਸ ਜੀਵਨ ਚੋਂ ਪਾਰ ਹੋ ਸਕਦੇ ਸੀ ਇੰਨਾ ਇੰਨਾ ਗਿਆਨ ਤੇ ਬਲ ਬੈਠੇ ਨੇ ਇੱਥੇ ਹੁਣ ਕੰਪਿਊਟਰ ਬਣਾਉਂਦੇ ਨੇ ਬੁੱਢੇ ਕਿੰਨੇ ਕਿੰਨੇ ਗਿਆਨਵਾਨ ਨੇ ਛੇ ਪੈ ਜਾਓ ਇਕੱਲੇ ਕੋਣਾ ਕੋਈ ਗਾਰੜੂ ਗਾਰੜੂ ਕੌਣ ਨਾ ਕੋਈ ਗੁਰਮੁਖੀ ਹੈ ਉਹਨਾਂ ਗਾਰੜੂ ਹੁੰਦਾ ਗਾਰੜੂ ਉਹਨੂੰ ਉਹਨੂੰ ਕਹਿੰਦੇ ਨੇ ਜਿਹਨੂੰ ਜੇ ਸੱਪ ਡੱਗ ਵੀ ਜਾਵੇ ਨਾ ਉਹਦਾ ਜ਼ਹਿਰ ਚੂਸ ਕੇ ਬਾਹਰ ਮੰਤਰ ਜਾਣਦਾ ਹੁੰਦਾ ਮਾਇਆ ਨਾਲ ਜਿਹੜੀ ਲੜ ਜਾਵੇ ਮੰਤਰ ਜਾਣਦਾ ਹੁੰਦਾ ਉਹਨੂੰ ਗਾਰੜੂ ਕਹਿੰਦੇ ਨੇ ਠੀਕ ਹੈ ਕੋਈ ਗੁਰਮੁਖੀ ਜੇ ਐਸਾ ਗਾਰੜੂ ਹੋਵੇ ਉਹਦੇ ਕੋਲ ਮਾਇਆ ਹੋਵੇ ਹਾਲੇ ਧੜ ਲਾਈ ਪਾਏ ਓਏ ਬਥੇਰੇ ਡੱਕ ਮਾਰੇ ਉਹਨੇ ਉਹਨੂੰ ਜੰਗਲ ਉਹਨੂੰ ਸਿਰ ਤੇ ਰੱਖ ਕੇ ਪੈ ਮੱਥਿਆ ਔਰ ਉਹ ਮਰੀਆ ਦੀ ਉਹਨੇ ਵੀ ਦੇਖ ਲਿਆ ਵੀ ਮੇਰੇ ਨਾਲ ਤਾਂ ਮਰਦਾ ਸੀ ਕਹਿੰਦੀ ਇਹ ਮਾਇਆ ਉਹਦੇ ਪਾਇਨ ਲੱਗੀਆਂ ਜੀ ਮਾਇਆ ਦਾ ਭਗਤਾਂ ਦੀ ਕਾਰਕਮਾਂ 'ਤੇ ਸ਼ਿਵ ਜੀ ਨੂੰ ਪੈ ਸਭ ਗੱਲ ਨੂੰ ਤਿਆਰ ਹੈ ਐਡ ਕਰ ਦਵੇ ਮੱਛੇ ਜਮਾਰੇ ਢੰਗ ਪਾਣੀ ਬੜੀ ਬਗਾਨ ਉਹ ਇਹ ਗੁਰਮੁਖਾਂ ਦੇ ਪੈਰਾਂ 'ਚ ਰਹਿੰਦੀ ਹੈ ਉਹ ਗੁਰਮਖਾਂ ਲੱਗਦੇ ਪੈਰਾਂ ਜਦ ਐ ਗਾਢੋਟੀ ਪਾਈਦਾ ਹੁੰਦਾ ਸਭ ਘੁੜ ਦਿੰਦਾ ਹੁੰਦਾ ਉਹ ਕਹਿੰਦਾ ਤੁਸੀਂ ਵੱਢ ਕੇ ਪਰੇ ਮਾਰੋ ਹਾਂਜੀ ਨਾਨਕ ਸੇਈ ਉੱਭਰੇ ਜੇ ਸੱਚ ਰਹੇ ਲਿਬਲਾਏ ਉਹ ਕਹਿੰਦਾ ਉੱਭਰੇ ਹੋਣੇ ਬਾਯਾ ਤੋਂ ਉੱਪਰ ਉੱਠ ਕੇ ਹੋ ਰਹੇ ਜਿਹੜਾ ਉਹਨਾਂ ਨੇ ਜੀਵਤ ਜੁਆ ਜਿਹੜੇ ਸੱਚ ਨੂੰ ਲਿਬਲਾ ਕੇ ਰਹਿੰਦੇ ਉਹ ਸਾਥੇ ਰਹੇ ਦੇਵ ਨਾਇ ਕੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਧੀਰਕ ਹੋਏ ਪੂਰਾ ਪਾਏ ਸੀ ਢਾਡੀ ਕਰੇ ਪੁਕਾਰ ਤਬੂ ਤੋਂ ਸੁਣ ਰਿਹਾ ਕਹਿਣ ਦਾ ਮਸਲਾ ਉਹੀ ਪੁਕਾਰ ਕਰ ਲੋਕਾਂ ਨੂੰ ਦੱਸ ਰਿਹਾ ਪ੍ਰਭੂ ਦੇ ਅੱਗੇ ਪੁਕਾਰ ਕਰ ਰਿਹਾ ਮੈਂ ਜੋ ਤੁਹਾਨੂੰ ਹੋਈ ਮੰਗ ਲਿਆ ਲੋਕ ਵੀ ਸੁਣ ਰਹੇ ਸਨ ਅਸਲ ਵਿੱਚ ਤਾਂ ਪ੍ਰਭੂ ਨੇ ਅੱਗੇ ਕਰ ਰਿਹਾ ਜੋ ਤੂੰ ਬੁਲਾ ਰਿਹਾ ਹਾਂ ਉਹੀ ਬੋਲ ਰਿਹਾ ਹਾਂ ਠੀਕ ਹੈ ਜੀ ਪ੍ਰਭੂ ਵੱਲੋਂ ਪਿੱਠ ਕਰਕੇ ਨਹੀਂ ਡਾਢੀ ਬੋਲ ਸਕਦਾ ਪ੍ਰਭੂ ਵੱਲੋਂ ਮੂੰਹ ਕਰਕੇ ਬੋਲੂਗਾ ਡਾਢੀ ਤਾਂ ਕਿ ਪ੍ਰਭੂ ਗਲਤੀ ਦੱਸੇ ਠੀਕ ਹੈ ਉਹ ਯਾਰਾ ਨਾਲ ਜੋੜ ਕੇ ਰੱਖਦਾ ਉਹੀ ਗੱਲ ਕਹਿ ਰਿਹਾ ਜੋ ਮੈਂ ਕਹਾ ਰਿਹਾ ਤੇ ਮੈਂ ਉਲਟ ਕਹਿ ਰਿਹਾ ਸੁਣਾਏ ਸੀ ਪ੍ਰਭੂ ਨੂੰ ਵੀ ਸੁਣਾਉਂਦਾ ਪ੍ਰਭੂ ਉਹਨੂੰ ਸੁਣਾਉਂਗਾ ਹਾਂ ਕੇ ਦੋਆਂ ਦਾ ਤਾਲ ਮਿਲਿਆ ਹਾਂਜੀ ਪ੍ਰਭੂ ਉਹ ਤੇ ਬਲਉਂਦਾ ਉਹ ਬੋਲਦਾ ਪ੍ਰਭੂ ਉਹਦੀ ਗੱਲ ਸੁਣਦਾ ਪ੍ਰਭੂ ਉਹਨੂੰ ਬਾਣੀ ਗੁਰੂ ਦੱਸ ਰਿਹਾ ਹੈ ਤੇ ਉਹ ਫਿਰ ਲੋਕਾਂ ਨੂੰ ਅੱਗੇ ਗੁਰਬਾਣੀ ਦੱਸ ਰਿਹਾ ਪ੍ਰਭੂ ਵੀ ਦੇਵਾਲ ਪਰੋਥੇ ਤੇਰੇ ਸਭ ਪਰਿਵਾਰ ਚ ਲਾਇਆ ਬੇਲੇ ਤੇਰੇ ਦਾ ਮੁੰਡਾ ਤਾਂ ਕਿਹਾ ਵੀ ਹਾਂ ਤੇਰੀ ਗੱਲ ਕਹੀ ਉਹ ਠੀਕ ਉਹ ਜਿਹੜਾ ਨਾਮਦੇਵ ਕਹਿੰਦਾ ਦੁੱਧ ਪੀਏ ਗੋਵਿੰਦ ਰਾਇਆ ਫੈਨਾ ਦੋ ਪ੍ਰਭੂ ਨੂੰ ਲਾਇਆ ਵੀ 10 ਠੀਕ ਹੈ ਗੱਲ ਕਹੀ ਹੋਈ ਫੇਰ ਦੂਜੀ ਇਹਨੂੰ ਦੱਸਦਾ ਦੋ ਠੀਕ ਹੈ ਜੀ ਆਪਣਾ ਚ ਪਹੇਲੀ ਲਈ ਕੁਝ ਵੀ ਗੱਲ ਹਾਂਜੀ ਅੰਦਰ ਧੀਰਕ ਹੋਏ ਪੂਰਾ ਪਾਇਸੀ ਅੰਦਰ ਅੰਦਰ ਉਹ ਧੀਰਜ ਜੇ ਮਨ ਹੋਇਆ ਜੇ ਮਨ ਪੂਰਾ ਪੂਰਾ ਕੀ ਪਾਇਸੀ ਜੋ ਪੂਰਾ ਮਿਲਿਆ ਗਿਆਨ ਸੁਣਿਆ ਉਹ ਕੂੜੇ ਦਾ ਪੂਰਾ ਸੁਣਿਆ ਗਿਆ ਜੇ ਤਾਂ ਮਰਦੀ ਟਗਿਆ ਹੋਇਆ ਦਾਦਾ ਤੁਰਕੀ ਬਾਣੀ ਸੁਣ ਲਈ ਪੂਰੀ ਦੀ ਪੂਰੀ ਤੇ ਅਤੀ ਸੁਣੀ ਅਤੀ ਦੀ ਬੱਲੇ ਪੈਂਦੀ ਫੇਰ ਗੱਲ ਚ ਬੋਲਡ ਪੈ ਜੂ ਫੇਰ ਬੁੱਲੇ ਦਾ ਗੁੱਲਾ ਹੀ ਰਹਿ ਜਾਣਾ ਦਾਣਾ ਨਹੀਂ ਰਹਿਣਾ ਉੱਤੇ ਜੋ ਤੁਰ ਲਿਖਿਆ ਲੇਖ ਤੇ ਕਰਮ ਕਮਾਲ ਸੀ ਜਾਂ ਹੋਵੇ ਖਸਮ ਦਇਆਲ ਮਹਿਲ ਘਰ ਪਾਈ ਸੀ ਕਿਹੜਾ ਅੰਦਰ ਮੰਨਣ ਦੀ ਗੱਲ ਅੰਦਰ ਬੱਧੀ ਹੋਈ ਹੈ ਗੱਲ ਜੋ ਸਰਪ ਤਾਂ ਉਹੀ ਕਮਾਉਂਦਾ ਜੋ ਤੋਂ ਲੈ ਗਿਆ ਲੈ ਕੇ ਕਰਮ ਪਵਾਏ ਸੀ ਇਹ ਸਾਰੀ ਦੁਨੀਆ ਦਾ ਹੀ ਕੰਮ ਹੈ ਤਾਂ ਤੇ ਉਹ ਆਪਣਾ ਸਾਰੀ ਦੁਨੀਆ ਜੋ ਇੱਛਾ ਆਪਣੀ ਥਾਂ ਚਾਲ ਕਰਦਾ ਪਰ ਜੇ ਤੇ ਤੇ ਸਹਿਬ ਦਿਵਾਲ ਹੈ ਉਹ ਆਪਣੇ ਘਰ ਚਲੇਗਾ ਉਹ ਆਪਣੀ ਮਰਜ਼ੀ ਨਹੀਂ ਕਰਦਾ ਉਹ ਸਹਿਬ ਦੀ ਮਰਜ਼ੀ ਕਰਦਾ ਅਸਲ 'ਤੇ ਕਰਦਾ ਤਾਂ ਆਪਣੀ ਮਰਜ਼ੀ ਹੈ ਸਹਿਬ ਦੀ ਮਰਜ਼ੀ ਆਉਲੀ ਮਰਜ਼ੀ ਕੋਈ ਉਨੇ ਵਹੀ ਪਦੇ ਹੁੰਦਾ ਲੈ ਇਹ ਗੱਲ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖੀ ਮਿਲਾਈ ਸੀ ਉਹ ਜਿਹੜਾ ਮੇਰਾ ਪ੍ਰਭਾ ਅਤ ਵੱਡਾ ਹੈ ਉਸ ਤੋਂ ਵੱਡਾ ਹੋਰ ਕੋਈ ਹੈ ਜੀ ਗੁਰਮੁਖਾਂ ਤੋਂ ਇਹ ਗੱਲ ਉਹਨੇ ਬੁਲਵਾਈ ਹੈ ਕਹੀ ਹੈ ਜਿਹੜਾ ਗੁਰਮੁਖਾਂ ਨੂੰ ਬੁਲਾਉਂਦਾ ਹੈ ਗੁਰਮੁਖਾਂ ਨੂੰ ਤੂੰ ਅਤ ਵੱਡਾ ਪ੍ਰਭੂ ਵੱਡਾ ਕੋਈ ਨਹੀਂ ਠੀਕ ਹੈ ਜੀ